ਕਿੰਨੇ ਅਨੇਕ ਗਵਾਰ ਵਿਕਾਰ ਕੰਨ ਮਹਾ ਦੁਰਗੰਧਿਤ ਵਾਸ 60 ਕਰਮ ਨੇ ਦੇਖ ਬਥੇਰੇ ਨੇ ਕਰਮ ਕੰਡ ਕੀਤੇ ਨੇ ਗਵਾਰ ਨੇ ਬਥੇਰੀਆਂ ਅਜਾੜੀ ਮੱਤਤਾ ਕਰ ਲੀਆਂ ਉਲਟੀਆਂ ਸਿੱਧੀਆਂ ਉਹ ਚ ਕਰਮ ਕੰਡ ਬਥੇਰੇ ਕਰਦੇ ਨੇ ਕਿਨੇ ਗਵਾਰ ਨਹੀਂ ਗਵਾਰ ਦਾ ਨਜ਼ਾਰਾ ਆਵੇਂਦੀ ਏ ਅਗਲੇ ਹਰੀ ਤੇ ਵੇਕਲ ਨੂੰ ਗਵਾਰ ਕਹਿੰਦੇ ਨੇ ਬੇਕਾਰ ਕੰਮ ਅੰਦਰ ਕਰਨੇ ਬਕਾਰ ਨੇ ਬਕਾਰ ਅੰਦਰ ਲਈ ਬਕਾਰ ਨੇ ਉਹ ਪੰਦਰੇ ਲਈ ਬਕਾਰ ਨੇ ਗਿਆਨ ਹੈ ਦੀ ਆਪਣੇ ਉਗਲਾਂ ਦਾ ਤੇ ਕਰਮਖੰਡ ਕਰੀ ਜਾਂਦੇ ਨੇ ਮਹਾ ਦੁਰਗੰਧਕ ਵਾਸ ਜੋ ਬੋਲਦੇ ਨੇ ਨਾ ਉਹਦੇ ਸਾਰੇ ਮਾਇਆ ਦੀ ਉਹ ਗੰਧ ਹੋ ਹੈ ਦੁਰਗੰਧ ਹੋ ਹੈ ਉਹ ਚੋਂ ਮੁਖਾਵਤ ਤਾਂ ਕਿ ਦੁਰਗੰਧ ਗੱਲਾਂ ਕਰਦੇ ਨੇ ਵਿਰੁੱਧ ਸੁਧੀਆਂ ਉਹਦੇ ਵਿੱਚ ਦੁਰਗੰਧ ਮਾਇਆ ਮਹਾ ਦੁਰਗੰਧਤ ਵਾਸ ਸੰਦਨਯ ਬੋਲਦੇ ਹਨ ਮਹਾ ਦੁਰਗੰਧਤ ਵਾਸ 60 ਤਨ 60 ਦਾ ਜਿਹੜਾ ਛੱਟਿਆ ਹੋਇਆ ਤਨ ਦਾ ਛਾਰ ਹੋ ਜਾਣਾ ਜਿਹੜਾ ਜੁੜਿਆ ਹੋਇਆ ਹੈ ਜਿਹੜੇ ਜੀਵਨ ਨਾਲ ਜੁੜਿਆ ਹੋਣਾ ਤੂੰ 60 ਲੱਗਿਆ ਨਾ ਕਠੋਰ ਆਤਮਾ ਦਾ ਇਹਦੇ ਨਾਲ ਤੂੰ ਆਪਣੇ ਆਪ ਨੂੰ ਜੋੜ ਰੱਖਿਆ ਇਹ ਤਾਂ ਦਵਾ ਦੀ ਤੇਰੀ ਹੈ ਇਹਦਾ ਸੱਚ ਕੋ ਤਾਂ ਨਾ ਬਾਹਰ ਲਾ ਇਹ ਜੁੜਿਆ ਹੋਇਆ ਹੈ ਇਹ ਦੁਆਰ ਚਾਰ ਤੇ ਬਨ ਹੋਰ ਕੁਝ ਨਹੀਂ ਹੈ ਇਹਦੇ ਕਰਕੇ ਵਾਸਤੇ ਲੋੜਾਂ ਦੀ ਪੂਰਤੀ ਲਈ ਗੱਲ ਕਰ ਰਹੇ ਨੇ ਇਹ ਤਾਂ ਕੋਈ ਆਪਣੇ ਵਾਸਤੇ ਕੀ ਕਰ ਰਹੇ ਹਾਂ ਕੁਝ ਨਹੀਂ ਠੀਕ ਹੈ ਜੀ ਫਿਰ ਤੋਂ ਗਰਭ ਗੁਬਾਰ ਮਰਨ ਨਾ ਜਾਣਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਨ ਨਈ ਫਿਰ ਤਾਂ ਗਰਭਗਵਾਰ ਗਰਭਗਵਾਰ ਚੋਂ اٹਿਆ ਹੋਇਆ ਗੁਰਦਾਨ ਆਪੇ ਫਿਰ ਬਣਿਆ ਮਰਨ ਨਾ ਜਾਣਈ ਮਰਨ ਬਿਕਰਿਆ ਹੋਇਆ ਤੈਨੂੰ ਤੈਨੂੰ ਹੀ ਬਗਾ ਮਰ ਜਾਣਾ ਮਰ ਜਾਣਾ ਸੁਭਾਅ ਬਣ ਜਾਂਦੀ ਔਦੀ ਛੜੀਏ ਦੀ ਹਰਾਂ ਹਰ ਚੰਦੌਰੀ ਵੇਖ ਕਾਲੇ ਸੱਜਮਾਨ ਅਜੇ ਤੈਂ ਦੇਖ ਲਈ ਨਾ ਵੀ ਤੇਰੇ ਤੇ ਜੰਦਵਾ ਟਾਣਿਆ ਹੋਇਆ ਹੈ ਵੀ ਇਹ ਮੇਰੀ ਪੂਜਾ ਹੁੰਦੀ ਹੈ ਇਹਨੂੰ ਸੱਜਮਾਨ ਹੈ ਵੀ ਜੈ ਇਹ ਭਗਵਾਨ ਕਹਿਣ ਲੱਗੇ ਲੋਕ ਤੈਨੂੰ ਆ ਪਰਮੇਸ਼ਰ ਕਹਿਣ ਲੱਗੇ ਕਿਉਂ ਦਾ ਜਨਮ ਲੈ ਲਿਆ ਕਿ ਤੂੰ ਇਹਨੂੰ ਸੱਜਮਾਨ ਬੈਠਿਆ ਬਹੁਤ ਬੜੇ ਕਲੇਖੇ ਜਾਂ ਤੂੰ ਤੂੰ ਆਇਆ ਝੂਠੀ ਨੂੰ ਸੱਜਮਾਨ ਬੈਠਿਆ ਕੋਈ ਕਾ ਜਿਹੜਾ ਮਾਨ ਸਨਮਾਨ ਨੇ ਨੂੰ ਸੱਚ ਮੰਨ ਬੈਠਿਆ ਅੱਗੇ ਜਾ ਕਿਸੀ ਹੋਗਾ ਹਾਂਜੀ ਇੱਥੇ ਫਿਰ ਹਰ ਹਾਂ ਕਿਵੇਂ ਜੁੜਦਾ ਇਹਦੇ ਨਾਲ ਹਰ ਹਾਂ ਹਰ ਚੰਦੌਰੀ ਪੇ ਕਾਹੇ ਸੱਚ ਮੰਨ ਲਈ ਉਹਦੇ ਨਾ ਕੁਝ ਮੰਨ ਲਿਆ ਮੈਂ ਨਹੀਂ ਕੁਝ ਰਾਣਾ ਦੇ ਬਾਅਦ ਮੈਨੂੰ ਨਹੀਂ ਪਤਾ ਕੀ ਹੈ ਮੈਨੂੰ ਸੱਚ ਕਿਉਂ ਮੰਨੇ ਸੱਚ ਦਾ ਬੰਨਣਾ ਨੂੰ ਤੁਸੀਂ ਵੀ ਕਹਿਣਾ ਸੱਚ ਇਹ ਮੇਰੇ ਹੱਥ ਕਲੇ ਤੇ ਮੈਂ ਨਹੀਂ ਸੱਚ ਬੰਦਾ ਇਹਨੂੰ ਤੁਸੀਂ ਰਾਜ ਕਾ ਦੇ ਬੰਦੇ ਮੈਂ ਨਹੀਂ ਸੱਚ ਬੰਦ ਹਾਂ ਨੂੰ ਇੱਜ਼ਤ ਗੁਰੂ ਘਰ ਦੀ ਕੀਤੀ ਪਰ ਉਹ ਇੱਜ਼ਤ ਨੂੰ ਉਹਨਾਂ ਨੇ ਨਹੀਂ ਕਿਹਾ ਸੀ ਕੋਈ ਫਰਮ ਗਿਆ ਨਹੀਂ ਆਸੀ ਗੁਰੂ ਆਇਆ ਦਾਸ ਹਾਂ ਭਾਈ ਉਹ ਨਹੀਂ ਬੈਠਾ ਹਾਂ ਉਹਦੇ ਉਹਨਾਂ ਨੇ ਜਿਹੜੀ ਮਰਜ਼ੀ ਕਰੀ ਜਾਣ ਠੀਕ ਹੈ ਜੀ ਅੱਜ ਕੱਲ ਦੇ ਸੰਤਾਂ ਵਾਂਗ ਨਹੀਂ ਜੀ ਐਡੇ ਐਡੇ ਮਹਿਲ ਬਣਾ ਲਏ ਬਿਲਕੁਲ ਨਹੀਂ ਉਹਨਾਂ ਨੇ ਕਰ ਦਿੱਤਾ ਇਹ ਜਿਨ ਜੋ ਮਰਜ਼ੀ ਤੇ ਆਚਰੀ ਜਾਨ ਠੀਕ ਹੈ ਜੀ ਇੱਥੇ 20ਵੇਂ ਚੰਦ ਦੀ ਸਮਾਪਤੀ ਹੈ ਜੀ